ਤੁਹਾਡਾ ਨਾਮ ਕੈਲਾ ਮਾ ਜੀ ਮੈਂ ਇੱਕ ਸਮਾਜ ਸੁਧਾਰ ਦੀ ਚੀਜ਼ ਵੀ ਕਹਿਣੀ ਆ ਛੋਟੀ ਜੀ ਅ ਥੋੜਾ ਜਾਂ ਮੈਂ ਜੇ ਕਹਾਂ ਤਾਂ ਰੰਗ ਬਦਲ ਕੇ ਫੇਰ ਮੁੜ ਕੇ ਫੇਰ ਰੰਗ ਬਦਲ ਲਊਗਾ ਮੈਂ ਇੱਕ ਸੰਜੀਦਾ ਜਈ ਨਜ਼ਮ ਜਿਹੜੀ ਲੰਡਨ ਦੀ ਧਰਤੀ ਤੇ ਬਹਿ ਕੇ ਲਿਖੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਹਿ ਕੇ ਉਹ ਤੁਹਾਡੇ ਪੇਸ਼ ਕਰਨ ਲੱਗਾ ਪਹਿਲੀ ਵਾਰੀ ਕਰਨ ਅਰਸ ਦੀ ਕੀਤ ਕਹਿਣ ਲੱਗਾ ਤੇ ਮੇਰੇ ਬੜੇ ਇੰਦੇਕੇ ਮਿੱਤਰ ਜਸਵਿੰਦਰ ਜੀ ਨੇ ਇਹ ਨਜ਼ਮ ਪਾਠ ਕੀਤੀ ਹੈ ਸਾਡਾ ਰਿਸਰਚ ਸਕਾਲਰ ਹੈ ਤੋਂ ਮੈਂ ਨਜ਼ਮ ਕਹਾ ਮਰਚੀਨੇ ਦਿਮਾਲਿਕ ਜੀ ਸ੍ਰੀ ਸਤਿਗੁਰੂ ਉਸ ਜ਼ਿੰਦਗੀ ਨੂੰ ਵਤਨ ਤੋਂ ਕਮਾਉਂਦੇ ਰਹੇ ਮਰਚੀਨੀਂ ਦੇ ਮਾਲਿਕ ਸ੍ਰੀ ਸਤਿਗੁਰੂ ਉਸ ਜ਼ਿੰਦਗੀ ਨੂੰ ਵਤਨ ਤੋਂ ਕਮਾਉਂਦੇ ਰਹੇ ਪਾਵੇਂ ਚੁੱਲੀਆਂ ਕਈ ਕਾਲੀਆਂ ਨੇਰੀਆਂ ਪਾਵੇਂ ਜ਼ੁਲਮਾਂ ਦੇ ਤੂਫਾਨੇ ਆਉਂਦੇ ਰਹੇ ਆਪਣੇ ਮਸਤਾਨਿਆਂ ਨੂੰ ਸਿਖਾਇਆ ਤੂੰ ਕੀ ਵਾਹ ਵਾਹ ਆਪਣੇ ਮਰਸਤਾਨਿਆਂ ਨੂੰ ਸੁਖਾਇਆ ਤੂੰ ਕੀ ਕੁਝ ਨਹੀਂ ਸਮਝ ਆਉਂਦੀ ਪਿਲਾਇਆ ਤੂੰ ਕੀ ਜਿਹੜੇ ਤੋਪਾਂ ਦੇ ਕੋਲੇ ਵਿਖਾਉਂਦੇ ਰਹੇ ਨਾਲੇ ਨਗਮੇ ਆਜ਼ਾਦੀ ਦੇ ਗਾਉਂਦੇ ਤੇਰੇ ਸਿੱਖਾਂ ਦੀਆਂ ਵੇਖ ਕੁਰਬਾਨੀਆਂ ਸਾਰੀ ਦੁਨੀਆਂ ਨੂੰ ਹੁੰਦੀਆਂ ਨੇ ਹੈਰਾਨੀਆਂ ਤੇਰੇ ਸਿੱਖਾਂ ਦੀਆਂ ਵੇਖ ਕੁਰਬਾਨੀਆਂ ਸਾਰੀ ਦੁਨੀਆਂ ਤਖਤਾਂ ਤੇ ਬਹਿ ਕੇ ਵੀਰ ਹੁੰਦਾ ਰਿਹਾ ਜ਼ੁਲਮ ਤਖਤਾਂ ਤੇ ਬਹਿ ਕੇ ਵੀਰ ਹੁੰਦਾ ਰਿਹਾ ਸਿੱਖ ਫਾਂਸੀ ਤੇ ਵੀ ਮੁਸਕਰਉਂਦੇ ਰਹੇ ਆਪਣੇ ਦਿਲ ਵਿੱਚ ਵਸਾ ਕੇ ਤੇਰੇ ਪਿਆਰ ਨੂੰ ਆਪਣੇ ਦਿਲ ਵਿੱਚ ਵਸਾ ਕੇ ਤੇਰੇ ਪਿਆਰ ਨੂੰ ਆਪਣੇ ਦਿਲਦਾਰ ਦੇ ਸੋਨ ਦੀਦਾਰ ਨੂੰ ਫੈਨੀ ਸਾਹਿਬ ਦੀ ਧੂਮੀ ਤਰਸਦੀ ਰਹੀ ਫੈਨੀ ਸਾਹਿਬ ਦੀ ਧੂਮੀ ਤਰਸਦੀ ਰਹੀ ਮਿੱਠੜੇ ਬੋਲ ਸੀ ਦਿਲ ਨੂੰ ਸਤੋਂਦੇ ਰਹੇ ਜਦੋਂ ਰੰਗੂਨ ਤੋਂ ਪੌਣ ਆਉਂਦੀ ਰਹੀ ਜਦੋਂ ਰੰਗੂਨ ਤੋਂ ਪੌਣ ਆਉਂਦੀ ਰਹੀ ਤੇਰੇ ਚਰਨਾ ਦੀ ਤੂੜੀ ਲਿਆਉਂਦੀ ਰਹੀ ਦਿਲ ਤੜਫਦਾ ਰਹਾ ਨੈਣ ਵਸਦੇ ਰਗੇ ਦਿਲ ਤੜਫਦਾ ਨੈਣੋਂ ਵਸਦੇ ਰਹੇ ਜਦ ਵੀ ਪਿਆਰਾਂ ਦੇ ਪੈਗਾਮੇ ਦੇ ਰਹੇ ਆਗਰੀ ਲਾਈਨਾਂ ਨੂੰ ਮਨਚ ਵੇਸ਼ਵਾਸ ਹੈ